ਓ ਜਿਣੇ ਖੜੇ ਨੂੰ ਮਾਰ ਦਈ ਰਜਾ ਘਾੜੇ ਚ ਫਰਕ ਪੈ ਹੀ ਗਿਆ ਆ ਉਹ ਇੱਕ ਤਾਂ ਉਹ ਨਹੀਂ ਜੋ ਨਾ ਪਾਪ ਕਰਨਤਾ ਉਹ ਨੰਤਾ ਤਾਂ ਪਤਿਤ ਪਾਵਨ ਕਹੇ ਨਾਮ ਹੰਤਾ ਜੇ ਮੈਂ ਪਾਪੀ ਨਾ ਹੁੰਦਾ ਤੈਨੂੰ ਪਤਿਤ ਪਾਵਨ ਕੌਣ ਆ ਨੰਦਾ ਆ ਆ ਆ ਆ ਆ ਆ ਆ ਆ ਆ ਆ ਆ ਆ ਆ ਆ ਆ ਆ ਆ ਨਾਲੇ ਰੋਈ ਜਾਂਦਾ ਏ ਨਾਲੇ ਕਿੱਕਾ ਮਾਰੀ ਜਾਂਦਾ ਇੱਕ ਪਾਸੇ ਕੋਈ ਨਜ਼ਰ ਆਉਂਦਾ ਉਸ ਪਾਸੇ ਆਖੀ ਜਾਂਦਾ ਏ ਮੇਰੇ ਸਾਹਿਬ ਸਤਿਗੁਰੂ ਰਾਮ ਸਿੰਘ ਜੀ ਆਦ ਪਾਸੇ ਨੂੰ ਆਏ ਸੀ ਕੂ ਨਹੀਂ ਵੇਖੇ ਕਿਹੜੇ ਪਾਸੇ ਗਏ ਨੇ ਦੇਰ ਥੱਲੇ ਲੈ ਗਿਆ ਏ ਤਰਕਾਲਾਂ ਪਈਆਂ ਨੇ ਜਦੋਂ ਬਾਹਰੋਂ ਫਿਰ ਵਾਲ ਖਿਲਰੇ ਨੇ ਜਿਹੇ ਦੀ ਹਾਲਤ ਹੁੰਦੀ ਅਵਜੋਗੀਆਂ ਦੀ ਇਹ ਫਿਰ ਬਣ ਕੇ ਵਜੋਗੀ ਵੇਂ ਨੂੰ ਤਰਿਆ ਜਾਂਦਾ ਹੈ ਇਹ ਸਭ ਹੈਰਾਨ ਨੇ ਬੜੀ ਹੈਰਾਨਗੀ ਨਾਲ ਪੁੱਛਿਆ ਸੰਤਹਿਲ ਤੋਂ ਜੀ ਹਜ ਕੀ ਕਾਰਨ ਬਣਿਆ ਤੁਸੀਂ ਪਾਠ ਕਰਦੇ ਆ ਕਰਦੇ ਆ ਰੁਮਾਲ ਵੀ ਨਹੀਂ ਪਾਇਆ ਉੱਤੇ ਰਮਾਲਾ ਵੀ ਨਹੀਂ ਪਾਇਆ ਕੀ ਤੁਹਾਡੇ ਅੰਦਰ ਉੱਠੀ ਤੁਸੀਂ ਕਿਸ ਨੂੰ ਦੱਸਿਆ ਹੀ ਨਹੀਂ ਅੱਖ ਲੱਗੇ ਮੈਂ ਕੀ ਦੱਸਾਂ ਤੁਹਾਨੂੰ ਸੁਪਨੇ ਆਇਆ ਪੀ ਗਿਆ ਮੈਂ ਚਲ ਭਰਿਆ ਰੋਇਆ ਮੇਰੇ ਅਗੇ ਸੁਪਨੇ ਅੰਗੂ ਚਾਤ ਆ ਗਈਆ ਮੇਰੇ ਅਗੇ ਚਲਕਾਈ ਮੇਰੇ ਕੋ ਜਰ ਨਹੀਂ ਹੋਇਆ ਮੇਰੇ ਕੋ ਹਿੰਮਤ ਨਹੀਂ ਪਈ ਮੈਂ ਤੁਹਾਨੂੰ ਦੱਸ ਸਕਾਂ ਹਾਂ ਨੇ ਫਿਰ ਦੱਸੋ ਅੱਖ ਨੇ ਮੈਂ ਕੀ ਦੱਸਾਂ ਪਾੜ ਕਰਦਿਆਂ ਕਰਦਿਆਂ ਮੇਰੇ ਅੰਦਰੋਂ ਹੀ ਆਈ ਬਈ ਕੀ ਬਤਾ ਤੁਸੀਂ ਕਿੱਥੇ ਬੈਠੇ ਹੋ ਜੇ ਮੈਂ ਇਥੇ ਬੈਠਾ ਬਾੜ ਕਰੀ ਜਾਣਾ ਤੇਰੇ ਨਿੱਤ ਮੇਰੇ ਬਾੜ ਦਾ ਤੈਨੂੰ ਕੀ ਪਤਾ ਮੇਰੀ ਨਿਗਾਹ ਪਈ ਤੇ ਸਾਂਵੇਂ ਸਰਦਲਾਂ ਚ ਖਲੋਤੇ ਆ ਦੱਸ ਸਕਾਂ ਮੇਰਾ ਸਰੀਰ ਆਪਣੇ ਵੱਲ ਤੋਂ ਬਾਹਰ ਹੋ ਗਿਆ ਮੈਂ ਨੱਤ ਗਿਆ ਮਗਰ ਉੱਠ ਕੇ ਆਹ ਗੋਡਿਆਂ ਤੇ ਗਿੱਤਿਆਂ ਤੇ ਲੱਤਾਂ ਡਗ ਡਗ ਛਾਪੀਆਂ ਕਿੰਨੇ ਥਾਈ ਡਿੱਗ ਡਿੱਗ ਕੇ ਸਭ ਚਿੱਠੀਆਂ ਲਈਆਂ ਪੁੱਛਿਆ ਕੀ ਕਰਨਾ ਖਲਕੇ ਪਤਾ ਨਹੀਂ ਮੈਂ ਕਿੰਨੀ ਵਾਰ ਡਿੱਗਾ ਹੈ ਕਿੰਨੀ ਵਾਰ ਉਠਿਉਂ ਆnde ਕੋਈ ਵਜਨ ਬਲਾਸ ਆnde ਕੀਤਾ ਸੀ ਜਦੋਂ ਸਾਹਨੇ ਸਰਦਾ ਖਲੋਤੇ ਇਹ ਮੈਨੂੰ ਆnde ਹੀ ਤੈਲ ਸੁ ਪ੍ਰੇਮ ਬੜਾ ਜਗਾਉਣ ਡਿਆ ਇਹ ਮੈਂ ਘਰ ਬਈ ਕਹੀ ਹੁਣ ਅਖਲਕੇ ਹੁਣ ਮੇਰੇ ਵੱਸ ਨਹੀਂ ਮਹਾਰਾਜ ਸ੍ਰੀ ਭਾਈ ਸਾਹਿਬ ਜਾਨਾ ਸਰਗੁਨਾਸੋ ਮੈਂ ਅਰ지 मैं ਹਾਂ ਮੇਰੇ ਤੇ ਕਿਰਪਾ ਕਰੋ ਮੈਂ ਸਮੁੰਦਰ ਪਾਰ ਜਾ ਕੇ ਦਰਸ਼ਨ ਕਰਕੇ ਹਾਂ ਮੈਂ ਉਹਨੂੰ ਤਾਨਾ ਮਾਰਿਆਈ ਤੂੰ ਕੀ ਪਤਾ ਕਿੱਥੇ ਆਂਦੇ ਉਸੇ ਵੇਲੇ ਆ ਕੇ ਸਮਝ ਖਲੋ ਗਿਆ ਤੋੜੋ ਮੈਨੂੰ ਆਂਦਾ ਤੂੰ ਪ੍ਰੇਮ ਵੜਾ ਜਗਾਉਣਾ ਕਰ ਬਈ ਇਕਾਵਸ ਦੋਨੇ ਦੋਨੇ ਗਿਲਕਾ ਮਾਰ ਰਹੇ ਨੇ ਕਿਨੀ ਵਾਲੇ ਪਾਤਸ਼ਾਹ ਕਦੋਂ ਦਾਰਸ ਦਿਖਾਵੇਗਾ ਕਾਲੀ ਕੰਮੀ ਵਾਲਿਆ ਕਦੋਂ ਫੇਰਾ ਪਾਵੇਗਾ ਕੇ ਫਿਰ ਮੰਗਦੇ ਨੇ ਹੁਕਮ ਸਤਗੁਰੂ ਅਰਿਸ਼ਿੰਗ ਮਹਾਰਾਜ ਜੀ ਆਂਦੇ ਅੱਗੇ ਬਹੁਤ ਮਸਤਾਨੇ ਦੋਨੇ ਜਾਂਦੇ ਨੇ ਮੈਂ ਵਰਜਦਾ ਆ ਨਾ ਜਾਓ ਬਹੁਤ ਸੰਕਤਾਈਆਂ ਨੇ ਬਹੁਤ ਥਾਂ ਥਾਂ ਦੇ ਖਲੋਤੇ ਨੇ ਸੀਆਈਡੀ ਵਾਲੇ ਤੇ ਫੜੀ ਜਾਂਦੇ ਨੇ ਸਿੱਖਾਂ ਨੂੰ ਜਿਹੜਾ ਤੁਰ ਜਾਂਦਾ ਉਹਦੇ ਆਉਣ ਦੀ ਸੁਤ ਨਹੀਂ ਪਤਾ ਨਹੀਂ ਆ ਜਾਵੇ ਪਰਦਕੇ ਨਾ ਆਵੇ ਜੋ ਕੋਈ ਇਥੋਂ ਦਾ ਵਾਤਾਵਰਨ ਸੀ ਅਧਿਆਪਨੀ ਪੁੱਤਰ ਧਰਤੀ ਦੇ ਵਿੱਚ ਮਸਤਾਨੇ ਹੋ ਕੇ ਸਤਿਗੁਰੂ ਰਾਮ ਸਿੰਘ ਜੀ ਕਈ ਗਰੀ ਗੰਮੀ ਬੋਲੇ ਬੋਲਣੇ ਆਖਣਾ ਇੱਥੇ ਮੇਰੇ ਮਸਤਾਨੇ ਲੁਗੜੇ ਵਾਲੇ ਦੇ ਦੁਆਨ ਲਾਇਆ ਕਰਨਗੇ